श्लोक महल्ला तीसरा खेत में अल्लाह कर ऊंचा निरणाव महल भक्ति घर सर है सज्जन पहुणया खेत में अल्लाह ऊचियां खेतियां वड्डा बहुत ऊचियां कर दिए कारण त्या निरणाव भी बहुत ऊंचा है ਠੀਕ ਹੈ ਜੀ ਉੱਚਾ ਘਰ ਬਣਾ ਲਿਆ ਖੇਤ ਦੀਆਂ ਬੱਚਾਂ ਬਹੁਤ ਉੱਚੀਆਂ ਕਰ ਲਈਆਂ ਪਹਿਲਾਂ ਖੇਤ ਸੀ ਬਟਾ ਉੱਚੀਆਂ ਕੀਤੀ ਉਹ ਵਿਚਾਲੇ ਘਰ ਬਣਾ ਲਿਆ ਉੱਚਾ ਬਣਾ ਲਿਆ ਘਰ ਉੱਚਾ ਬਣ ਗਿਆ ਉੱਚਾ ਬਣ ਗਿਆ ਮਹਿਲ ਬਣਾ ਲਿਆ ਨਾ ਉੱਥੇ ਫਿਰ ਠੀਕ ਹੈ ਜੀ ਮੈਨ ਭਗਤੀ ਘਰ ਕਰਦਾ ਮਹਿਲ ਅੰਦਰੇ ਬਣ ਗਿਆ ਭਗਤੀ ਅੰਦਰੇ ਕਰਦਾ ਸੱਜਣ ਪਹੁੰਚਿਓ ਸੱਜਣ ਪਹੁੰਚਦੇ ਸਾਤਰ ਉੱਧਰੇ ਬਣਾ ਲਿਆ ਸਭ ਕੁਝ ਅਵਸਥਾ ਉੱਚੀ ਕਰ ਲਈ ਆਇਆ ਤੋਂ ਕਲ ਬਦਲੀ ਮਿਆਲਾ ਉੱਚੀਆਂ ਕਰਦੀਆਂ ਮਿਆਲਾ ਕਾਦੇ ਉੱਚੀਆਂ ਕਰਦੀਆਂ ਵਟਾ ਕਾਦੇ ਉੱਚੀਆਂ ਕਰਦੀਆਂ ਆਇਆ ਦੇ ਬਕਾਲ ਨਾ ਬਣ ਆਇਆ ਦੇ ਮਾਇਆ ਦੇ ਨਾ ਚੱਕਣ ਕਦੇ ਫਲੱਡ ਉੱਚੀਆਂ ਕਰਕੇ ਫਿਰ ਉੱਚੇ ਤੋਂ ਬਕਾਲ ਬਣਾਇਆ ਫਿਰ ਵੀ ਆਲੇ ਵਾਲੇ ਵਟਾ ਰੱਖੀਏ ਬਕਾਲ ਦੇ ਉੱਚੀ ਉਹਦੇ ਕਤੇ ਬਰਾਬਰ ਚੌਧਰੇ ਦੇ ਪਾਣੀ ਆ ਕੇ ਅੰਦਰ ਨਾ ਜੇ ਠੀਕ ਹੈ ਜੀ ਹਾਂ ਹਾਂ ਜੀ ਮਹਿਲ ਭਗਤੀ ਕਰ ਕਰਸਰ ਸੱਜਣ ਪਹਣਿਓ ਸ਼ਬਦ ਗੁਰੂ ਪ੍ਰਗਟ ਹੋਵੇ ਅਵਸਥਾ ਦੀ ਗੱਲ ਹੈ ਜੀ ਹਾਂ ਜੀ ਬਰਸਣਾ ਤਾਂ ਬਰਸ ਘਣਾ ਬੋੜ ਬਰਸੈ ਕਾਹੇ ਨਾਨਕ ਤិន ਬਨਹਾਰਣੇ ਜਿਨ ਗੁਰਮੁਖੀ ਪਾਇਆ ਮਨ ਮਾ ਭੈਣਾ ਹੁਣ ਬਰਸ ਮਹਿਲਾ ਉੱਚੀਆਂ ਕੀਤੀਆਂ ਆਂ ਮੈਂ ਵੀ ਟਕੜਾ ਕੀਤਾ ਔੜ ਲਾਲਾ ਉਹ ਰਹਿ ਤਾ ਮੈਂ ਤੇ ਪਿਆਸੀ ਰੁੜ ਜਾਂਦਾ ਸੀ ਪਾਣੀ ਸਾਰਾ ਹੀ ਹੁਣ ਮਹਿਲਾ ਹੈ ਵੀ ਟਕੜੀਆਂ ਕਰਦੀਆਂ ਉੱਚੀਆਂ ਬਰਸ ਘਣਾ ਨਾ ਪਰਸ ਰੁਕੇ ਪਾਣੀ ਮਹਿਲਾ ਉੱਚੀਆਂ ਕੀਤੀਆਂ ਨੇ ਹੂੰ ਬਰਸ ਘਣਾ ਬਰਸਣਾ ਬਰਸ ਘਣਾ ਬਰਸਣਾ ਤਾਂ ਬਰਸ ਘਣਾ ਬਹੁੜ ਬਰਸੈ ਕਾਹੀ ਬਲਸ ਬਲਸ ਪਿੱਛੇ ਨਹੀਂ ਵਰ ਕੀ ਪਰਸਨਾ ਬਤੋ ਜਦ ਕਾ ਨਾ ਸਹੀ ਸਾਡੇ ਗਾਮ ਮੁਕਦੇ ਫੇ ਪਰਤੀ ਨਾ ਵਰਤੀ ਤੇਰੀ ਮਰਜੀ ਸਾਡੇ ਦਾ ਤਰਗਾਣਾ ਵਰਸ ਅਸੀਂ ਆਸ ਵਿੱਚ ਬੈਠਿਆ ਮੈਂ ਬਣਾਈ ਵਰਸ ਤੇ ਬਲਸਾਂ ਦਾ ਸਾਡੇ ਸਾਹ ਚੱਲਦੇ ਚੱਲਦੇ ਬਲਸ ਫੇਰ ਕਾ ਨੂੰ ਵਰਸਾਂ ਫੇਰ ਤੇਰੀ ਮਰਜੀ ਵਰਸ ਲੋ ਬਤ ਹਾਂਜੀ ਨਾਨਕ ਤਿੰਨ ਬਲਹਾਰਣ ਜਿਨ ਗੁਰਮੁਖੀ ਪਾਇਆ ਮਨ ਮਾਹੀ ਜਾਨ ਕਤਲ ਬਲੇ ਹਾਲ ਜਿਹਨ ਗੁਰੂ ਮੁਖੀ ਪਾਇਆ ਕਹਿੰਦਾ ਜਿਹਨਾਂ ਦੇ ਬਲਿਆਲ ਦੇ ਛੇ ਨਾ بارش ਫੋਤੇ ਅੰਦਰੇ ਲੱਗੀ ਦੇ ਛੇ ਪਰ ਪਰਸਿਆ ਦੇ ਬਲੇ ਹਾਲ ਜਿਹਨਾਂ ਦੀ ਗੱਲ ਬੰਦ ਕੇ ਪਰਸਿਆ ਨਾ ਠੀਕ ਹੈ ਬਲੇ ਹਾਲ ਅਰ ਉੱਤੇ ਡੋਂਦੇ ਵੀ ਥੱਲੇ ਤੋਂ ਜਾਣਾ ਪਾਣੀ ਤੇ ਤੀਜਾ ਮਿੱਠਾ ਸੋਜੋ ਭਾਮਦਾ ਸੱਜਣ ਸੋ ਜੇ ਰਾਸ ਨਾਨਕ ਗੁਰਮੁਖੀ ਜਾਣੀਐ ਜਾਂ ਕੋ ਆਪ ਕਰੇ ਪ੍ਰਗਾਸ ਜਨਾ ਜਿਹੜਾ ਚੀਜ਼ ਭਉਂਦੀ ਉਹ ਮਿੱਠੀ ਹੁੰਦੀ ਹੈ ਚਾਹ ਕਿਸੇ ਦੀ ਚੁਗਲੀ ਹੋਵੇ ਤੇ ਥੋੜੀ ਖਾਈ ਦਾ ਅਸਰ ਤੇ ਹੋਈ ਮਿੱਠੇ ਜੇ ਕਿਸੇ ਦੀ ਚੁਗਲੀ ਮਿੱਠੀ ਲੱਗਦੀ ਹੋਵੇ ਉਹ ਵੀ ਮਿੱਠਾ ਮਿੱਠੀ ਲੱਗਦੀ ਹੋਵੇ ਉਹ ਵੀ ਮਿੱਠਾ ਮਿੱਠਾ ਸੋਜੋ ਭਾਮਦਾ ਸਾਲੂ ਬਿਠਾ ਸੰਸਾਰੀ ਗੱਲ ਹੈ। ਅੱਛਾ ਜੀ। ਜੋ ਮਨੋਪੋਨੇ ਉਹ ਹੀ ਬਿਠਾ ਭਾਈ। ਜਿਹੜਾ ਉਹ ਬਿਠਾ ਲੱਗਦਾ। ਰਾਸ। ਸੱਜਣ ਸੋਜੇ ਰਾਸ ਸੱਜਣ ਉਹ ਆਪ ਦਾ ਰਾਸ ਹੋਵੇ। ਠੀਕ ਹੈ ਹੋਵੇ। ਮੇਰੇ ਦੁੱਖ ਸੁੱਖ ਦਾ ਸਾਥੀ ਹੋਵੇ ਸੱਜਣ ਉਹ। ਸੰਸਾਰੀ ਗੱਲ ਐ ਇੱਥੇ ਤਾਂ। ਅੱਛਾ ਜੀ। ਮੇਰੇ ਰਾਸ ਮੇਰਾ ਠੀਕ ਹੈ ਜੀ ਜੋ ਸੱਚ ਦੱਸਦਾ ਉਹ ਵੇਰੇ ਗਲਾਮ ਹੈ ਮੇਰੇ ਗਲਾਮ ਮੇਰਾ ਕਹਦਾ ਕਿ ਕਿਹਨੂੰ ਵੇਰੇ ਗਲਾਮ ਹਾਂ ਜੀ ਨਾਨਕ ਗੁਰਮੁਖਿ ਜਾਣੀਐ ਜਾਂ ਕੋ ਪਰ ਨਾਨਕ ਕਹਿੰਦਾ ਗੁਰਮਖਾਨੇ ਦਾ ਜਾਣਿਆ ਸੱਜਣ ਉਹਨੂੰ ਮਿੱਠਾ ਉਹਨੂੰ ਜਿਹੜਾ ਪ੍ਰਗਿਆਸ ਕਰਦਾ ਅੰਦਰ ਜਿਹਨਾਂ ਨੂੰ ਆਪ ਕਰੇ ਪ੍ਰਗਿਆਸ ਪ੍ਰਗਿਆਸ ਕਰਨ ਵਾਲਾ ਹੀ ਮਿੱਠਾ ਹੈ ਕਰਨ ਵਾਲਾ ਸੱਜਣ ਤੁੜਿਆ ਪੀ ਸਜਣਾ ਦਾ ਸਜਣਾ ਗਿਆ ਚਾੜੀ ਐ ਨਾਨਕ ਗੁਰਮੁਖੀ ਜਾਣੇ ਗੁਰਮੁਖਾ ਨੇ ਉਹਨੂੰ ਸਜਣਾ ਜਾਣੇ ਜੇ ਕੋ ਆਪ ਕਰੇ ਪ੍ਰਗਿਆਸ਼ਾ ਬਿੰਦੂ ਪ੍ਰਗਿਆਸ਼ ਕਰੇ ਗਿਆਨ ਹੋਵੇ ਹੋਵੇ ਉਤਾ ਉਹਦੇ ਬਾਅਦ ਸੇ ਅੰਦਰ ਪ੍ਰਗਿਆਸ਼ ਕਰੇ ਉਹ ਗਿਆਨ ਉਹ ਦੀਵਾ ਤੇਰੇ ਅੰਦਰ ਜਾਲ ਫਿਰ ਪ੍ਰਗਿਆਸ਼ ਹੈ ਜਿਆ ਰਾਜਾ ਦੇ ਲੋੜ ਰਖਾਇਆ ਜਾਂਦੇ ਜੋ ਕਰਕੇ ਵੇਰਾ ਕਰਕੇ ਚੋਰੀ ਜਨ ਨੂੰ ਅਗਲੇ ਨਾ ਮੱਥੇ ਨੂੰ ਚਲਕੇ ਲਾ ਦੇ ਪੌੜੀ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਸਦਾ ਸਦਾ ਹਾਂ ਤੁਧ ਤੇ ਜਨ ਕੀ ਹੈ ਇਹ ਪ੍ਰਭ ਤੂੰ ਸੱਚਾ ਸਾਈ ਇਹ ਸਦਾ ਵਾਸਤੇ ਸਾਈ ਉਹਦਾ مالک ਹੈ ਕੋਈ ਇਸ ਗੱਲ ਨੂੰ ਬੁਝੇ ਕੋਈ ਦੋ ਬੁਝੇ कोई ਸਾਈ ਕਿਵੇਂ ਨੂੰ ਬਣਾਵੇ ਨਾ ਬਣਾਵੇ ਅਸਲ ਦੇ ਵਿੱਚ ਗੱਲ ਇਹ ਹੈ ਸਦਾ ਹੀ ਸਰਬਦਾ ਸਾਈ ਤੂੰ ਹੈ ਤੇ ਚਾਚਾ ਠੀਕ ਹੈ ਜੀ ਪ੍ਰਭ ਦਾ ਭਾਵ ਆਪਣਾ ਮੂਲ ਹੈ ਜੀ ਹਾਂ ਜੀ ਠੀਕ ਹੈ ਜੀ ਤੂੰ ਰਖਵਾਲਾ ਸਦਾ ਸਦਾ ਹਉ ਤੁਧ ਧਿਆਈ ਤੂੰ ਰਖਵਾਲਾ ਸਦਾ ਸਦਾ ਤੂੰ ਜੀ ਜੰਤ ਸਭ ਤੇਰੀਆਂ ਤੂੰ ਰਹਾ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਜੀ ਜੰਤ ਸਭ ਤੇਰੇ ਆ ਜਿੰਨੇ ਜੀ ਜੰਤ ਨੇ ਸਭ ਤੇਰੇ ਦੀ ਤੂੰ ਰਹਾ ਸਮਾਈ ਠੋਕੇ ਸਾਰਿਆਂ ਸਮਾਇਆ ਹੋਇਆ ਤੂੰ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਜਿਹੜਾ ਤੇਰੇ ਦਾਸ ਦੀ ਦੁਧਾ ਕਰਦਾ ਨਾ ਉਹਦਾ ਮਾਰ ਐਸੀ ਪੈਦੀ ਆ ਪਤਾ ਗਿਆਨ ਕਿੰਨਾ ਲੈ ਜਾਂਦਾ ਹੈ ਐ ਭਈ ਜਿਉ ਮੱਤੇ ਗਿਆਨ ਰਹਿ ਜਾਂਦਾ ਘਾਹੂ ਸਾਰੇ ਗਿਆਨ ਨਸ਼ਟ ਗੁਣ ਗਲ ਜਾਂਦੇ ਮੌਲਿਆਂ ਜਨ ਸਾਰੇ ਗੁਣ ਗਲ ਜਾਂਦੇ ਕੋਈ ਗੁਣ ਨਹੀਂ ਰਹਿ ਚਿੰਤਾ ਛੱਡ ਚਿੰਤ ਰਹੋ ਨਾਨਕ ਲੱਗ ਪਾਈ ਚਿੰਤਾ ਛੱਡ ਚਿੰਤ ਰਹੋ ਨਾਨਕ ਲੱਗ ਪਾਈ ਉਹਨੇ ਕਹਿੰਦਾ ਚਿੰਤਾ ਛੱਡ ਰਿਓ ਵਕੀਤ ਰਹੋ ਉਹਦੇ ਚੜ ਨਹੀਂ ਲੱਗੇ ਰਹੋ ਠੀਕ ਹੈ ਜੀ ਇੱਥੇ ਜਦੋਂ ਸ਼ੁਰੂ ਚ ਆਇਆ ਸੀਗਾ ਪ੍ਰਭ ਪਾਸ ਜਨ ਕੀ ਅਰਦਾਸ ਤੇ ਅਰਦਾਸ ਕਰਨੀ ਹੈ ਉਹ ਤਾਂ ਤਾਂ ਜੇ ਡੋਲਨ ਤੇ ਰਾਖੋ ਪ੍ਰਭੂ ਮਾਂ ਕਹੀਏ ਤਾਂ ਹੰਕਾਰ ਆ ਜਾਂਦਾ ਅੱਛਾ ਜੀ ਤੇਰੇ ਪ੍ਰਭ ਪ੍ਰਭੂ ਨੂੰ ਕਹਿ ਰਿਆ ਹੋਣਾ ਉੱਥੇ ਕਹਿ ਰਿਆ ਡੋਲ ਦਾ ਮਾਜ ਅੱਛਾ ਜੀ ਦੋਨਾਂ ਦਾ ਡੋਲਦਾ ਹੀ ਦੀ ਦੋਨਾਂ ਦਾ ਮਾਨ ਹੂੰ ਹੂੰ ਉਹਨਾਂ ਫੇਰੋਂ ਕਹਿੰਦਾ ਵੀ ਮਾਗੇ ਤੇਰੀ ਕਿਸ ਤੀਰ ਅੱਗੇ ਬੈਗ ਕਿ ਤੇ ਫੇਰਨਾ ਚੱਲ ਪਰ ਮੈਂ ਪ੍ਰਭਰ ਪ੍ਰਭੂ ਪ੍ਰਭੂ ਨੂੰ ਹੋ ਰਹੀ ਹੈ ਇੱਥੇ ਪ੍ਰਭ ਦੀ ਹੋ ਰਹੀ ਹੈ ਗੱਲ ਤੇ ਲੱਖੋ ਪ੍ਰਭੂ ਰਘੂ ਨਾਲ ਬਹੁਤ ਕੀ ਆ ਬੈਠੇ ਨੇ ਉੱਥੇ ਅੱਛਾ ਜੀ ਜਿਵੇਂ ਬੈਠਾ ਵੀ ਬੈਠਾ ਹੈ ਹੂੰ ਦੇ ਸਾਹਮਣੇ ਜੇ ਕੋਈ ਚੀਜ਼ ਮੰਗਣੀ ਹੋਵੇ ਕੰਪਲੀਟ ਕਰਦੀ ਇਹਦਾ ਸਪਾਈ ਨਾ ਐਸਪੀ ਨੂੰ ਕਰ। ਥਾਂ ਦਾ ਦੁਕੀਦਰ ਥਾਂ ਦਾ ਲੁਟਾਉ ਤੇ ਪਾਸੇ ਹੋ ਗਿਆ ਗਿਆ ਡੋਲ ਡੋਲ ਕੇ। ਕੋਈ ਮਨ। ਉਹ ਜੇ ਘਾਰੇ ਡੋਲਣ ਤੇ ਸਾਨੂੰ ਦੋਹਾਂ ਨੂੰ ਡੋਲਣ ਤੇ ਰੱਖੋ। ਮੰਡੋਲ ਗਿਆ ਜੇ ਤੂੰ ਡੋਲ ਗਿਆ। ਕਾਇਮ ਹੱਥ ਅੱਛਾ ਜੀ। ਡੋਲਣ ਦਾ ਸੁਭਾਅ ਤਾਂ ਹੀ ਹੈ। ਮਾਰੀ ਉਹਨੂੰ ਐਂ ਡੋਲਣ ਜੋਰ ਜੋਰ ਬੇਦੇ ਕਰ ਜਾ ਵਰਡ ਕਿਤੋਂ ਹੀ ਛੱਡਦੀ ਹੋਵੇ ਖੰਦ ਹਾਂਜੀ ਉਹ ਕਹਿੰਦਾ ਮੋਝ ਘੋੜੀ ਰੱਖੀ ਪਾ ਕੇ ਖੰਗੀ ਨਾ ਅਰ ਉਹ ਬੰਦੇ ਖੰਗੂ ਕੀਤੀ ਕੀਤੀ ਬਣੇ ਗਏ ਉਹ ਕਹਿ ਰਿਹਾ ਵੀ ਆ ਖੰਗ ਤੇ ਵਿਚਾਰ ਰੱਖੀ ਦੋ ਕੁ ਮਿੰਟ ਉਹ ਜਿਹੜਾ ਦੋ ਹੀ